ਜਿੰਨੇ ਨੀਚੇ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਵਾਜ ਚਿੱਤ ਤੱਕ ਪਾਰ ਦੀ ਗੱਲ ਹੈ ਉਹ ਇੱਡਾ ਬੜਾ ਚਾਲੂ ਹੈ ਕਿ ਗਰੀਬ ਜਿਹੜਾ ਜਿਆਦਾ ਬਣਦਾ ਉਹਨੂੰ ਨਵਾਜਦਾ ਗਰੀਬ ਤੇ ਬਖਸ਼ਿਸ਼ ਕਿੰਨਾ ਜਿਆਦਾ ਗਰੀਬਾ ਉਡੀ ਵੱਡੀ ਬਖਸ਼ਿਸ਼ ਕਿਹੜਾ ਹੱਦ ਅੱਤ ਦਾ ਗਰੀਬ ਹੋਈ ਉਹ ਨਾ ਅੱਤ ਦਾ ਗਰੀਬ ਉਹ ਤੇ ਅੱਤ ਦੀ ਬਖਸ਼ੀ ਸੀ ਨਾਮ ਤਾਂ ਮਿਲਦਾ ਅੱਤ ਦੀ ਬਖਸ਼ੀ ਨਾਮ ਹੈ ਬਰੀ ਬੋਹ ਰਾਜ ਦਾ ਸਾਰਾ ਲੋਕ ਨਹੀਂ ਭੋਗ ਜਿਹਦਾ ਕੋਈ ਗਰੀਬ ਨਾ ਹੋਵੇ ਅਸਲ ਗਰੀਬ ਉਹ ਨਹੀਂ ਜਿਹਦੇ ਨਾਲ ਕੋਈ ਅਮੀਰ ਹੈ ਉਹ ਗਰੀਬ ਹੈ ਜਿਹਦੇ ਨਾਲ ਕੋਈ ਗਰੀਬ ਹੈ ਨਹੀਂ ਉਹ ਅਸਲ ਗਰੀਬ ਉਹ ਗਰੀਬੀ ਤੋਂ ਥਲੀ ਨੂੰ ਨਾ ਬੋਲ ਤੇ ਥੱਲੇ ਆ ਤਾ ਗਰੀਬ ਹੈ ਇਹ ਤੇ ਉਹ ਫਿਰ ਥੋੜਾ ਗਰੀਬ ਥੋੜਾ ਗਰੀਬ ਥੋੜਾ ਗਰੀਬ ਥੋੜਾ ਗਰੀਬ ਉੱਤੇ ਥੋੜਾ ਦਾ ਅਲਗੂ ਉਹ ਗਰੀਬ ਨੂੰ ਥੋੜਾ ਹੋਊਗਾ ਪੂਰਾ ਸਹੀ ਗਰੀਬ ਉਹ ਥੱਲੇ ਆ ਜਿਹੜਾ ਗਰੀਬ ਹੈ ਸਭ ਤੋਂ ਉਹਨੂੰ ਕੋਸਤੀ ਵੀ ਦੇ ਦਿੰਦੇ ਜੇ ਮੈਂ ਇਕਲਾ ਧੀਏ ਇੱਕ ਥਲਾਸਰੇ ਆਪਣਾ ਇੱਕ ਥਲਾ ਉਹਦੇ ਜ਼ਮੀਨ ਦਾ ਰਖਿਆ ਪਰ ਇੱਕ ਜਦ ਅਦੂ ਹੋ ਗਿਆ ਹੁਣ ਜਿਹੜਾ ਜ਼ਮੀਨ ਤਾਂ ਬਿਲਕੁਲ ਜਿਹੜਾ ਦੀ ਮੁੱਕ ਜਾਂਦੀ ਹੈ ਜਾ ਕੇ ਉਹ ਜ਼ਮੀਨ ਨਾਲ ਰਹਿ ਜਾਂਦਾ ਜਿਹੜਾ ਠੀਕ ਹਦੋਂ ਤੇ ਉਹ ਇਸਾ ਜ਼ਮੀਨ ਨਾਲ ਜਿਹੜਾ ਉਹ ਸਿਰੇ ਤੋਂ ਥੋੜਾ ਇੱਕ ਉਪਰ ਉੱਠਿਆ ਉਹਦਾ ਇੱਕ ਉਪਰ ਤੱਕ ਲੱਗਣਾ ਸੈਟੀਫਾਈ ਕਰ ਜਿਹੜਾ ਥੱਲੇ ਵਾਲਾ ਸਾਰੋਂ ਫਲੇ ਸਭੀ ਲੋ ਲਗੇ ਹੋਈ ਜੋ ਹੋ ਜਾਵੇ। ਬਾਗੀ ਜਿਹੜਾ ਧੂਆ ਪਾਸੋਂ ਉਸ ਨੂੰ ਦੇ ਫਿਰ ਚੱਲ। ਅਗਰ ਤੇ ਹੰਕਾਰ ਵਾਲਾ ਜਿਹੜਾ ਸਿਰ ਹੈ ਦੂਜਾ ਜਦ ਇਹਨਾਂ ਕਿੱਥੇ ਮੋੜ ਕੇ ਉਹਦੇ ਨਾਲ ਆ ਜਾਣਾ। ਤੁਮਾਗੇ। ਤੁਮਾਗੇ ਜਾਦੋ ਨਾ ਕਾਰ ਵਾਲੇ ਜਿਵੇਂ ਆ ਉਹ ਤਾਂ ਆ ਮੈਂ ਲੋ ਕਮਾ ਕੇ ਅਸਤੋਂ ਆ ਫਿਰ ਐਸੋ ਇਸੇ ਤਰ੍ਹਾਂ ਬੀਤ ਜੇ ਮਾਨਾ ਚੇਤਾ ਕਮ ਜੁਬਾਣਾ ਉਹ ਵੀ ਇਸੇ ਬਰਾਬਰ ਨਹੀਂ ਇਧਰ ਬੀਤ ਜਦ ਉਤੋਂ ਉਤੋਂ ਹੀ ਆਇਆ ਅਦੋ ਇਸੇ ਤਰ੍ਹਾਂ ਜੇ ਸੰਗ ਹੋਣਦਾ ਤਾਂ ਵਿਛੜਾਇਓ ਇਹ ਦੋਹਾਂ ਦਾ ਧੰਕ ਬਣਾ ਕੇ ਬੁੱਧੀ ਵੀ ਜੜਾ ਹੈ ਉੱਥੇ ਉੱਥੇ ਜੋੜ ਕੇ ਜੱਤਾਂ ਨੂੰ ਆਇਆ ਇੱਕ ਮਹਾਦੇਵ ਉੱਥੇ ਕੀ ਹੈ ਇਹ ਸੁਰਤ ਨਾਲ ਤੰਦ ਲਾਜ ਦੀ ਹੋਣੀ ਸੁਸਜੋ ਇੱਧਰ ਵੀ ਇੱਧਰ ਵੀ ਕੋਰਾ ਨਾਲ ਇਹ ਤੋਫੇ ਵਾਲੀ ਦਾ ਬੰਦ ਕਰੋ ਜਸਵੰਤ ਵਾਲੀ ਹੋਜੀ ਮੈਂ ਨਹੀਂ ਜਿਆਦਾ ਜਿੱਦੋਂ ਉਹਦੇ ਜਿੰਨਾ ਹੀ ਬੋਲਦੀ ਹੋਈ ਉਹਦੇ ਵਰਗਾ ਹੀ ਹੋ ਜਵੇ ਅਸਤਾਇ ਸ਼ਾਦਾ ਬਣਿਆ ਹੋਇਆ ਇਹ ਤਾਂ ਜਗਾਤਾ ਹੀ ਤਾਂ ਹੋਣਾ ਹੀ ਹੋਵੇ। ਹਾਂ। ਕਿਰਮੇ ਨੀਚ ਕੂਟ ਕੋ ਰਾਜ ਪਾਰ ਬ੍ਰह्म ਗ੍ਰੀਵ ਨਵਾਜ। ਕਿਰਮੇ ਨੀਚ ਕੇਡ ਕੋ ਰਾਜ। ਬਹੁਤ ਛੋਟੇ ਤੋਂ ਛੋਟਾ ਜਿਹਾ ਸਿਮਟਾ। ਇੱਕ ਸੈਂਟ ਵਾਲੀ ਜਿਹੜਾ ਰਾਜਾ ਮੰਨੂੰ। ਰਾਜ ਰਾਜ ਹਰੇਕ ਜਦ ਜੂਗ ਦੇ ਵਿੱਚ ਰਾਜ ਵਖਰਾ ਉੱਠਾਉ। ਛੇ ਰਾਜ ਛੇ ਰਾਜ ਆਇਆ। ਉਹ 36 ਰਾਜ ਲੀਏ। ਸਰਪੰਚ ਦੇ ਸਾਹਮਣੇ ਰਾਜਾ ਹੁੰਦਾ। ਹਰੇਕ ਜੂਗੀ ਦਾ ਆਪਣੇ ਆਪਣੇ ਰਾਜ ਹੁੰਦੇ। ਜਿਹੜੇ ਘੱਟ ਸ਼ਕਤੀ ਵਾਲੇ ਨੇ। ਉਹ ਸ਼ਕਤੀ ਦੇ ਨਾਲ ਨਿਸ਼ਕੰਟਦੇ। ਇਹ ਵੀ ਪਾਵਰ ਤੋਂ। ਕੋਰੇ ਨਿਆਵੀ ਕਹਿ ਕੇ ਜਿਹੜੇ ਨਾ ਰਾਜ ਹੁੰਦਾ। ਇਹਦਾ ਅਸਰ। ਕਿਹੜਾ ਆਦਮੀ ਨਹੀਂ ਕੰਸਰਤਾਇਆ ਤੇ ਕਿਹੜਾ ਚੱਕ ਕੇ ਨੂੰ ਰਾਜਾ ਬਣਾ ਕੇ ਆਦਮੀ ਬਣਾ ਕੇ ਰਾਜਾ ਬਣਾ ਕੇ ਕੁਰਸੀ ਤੇ ਬੈਠੀ ਗੱਲ ਹੈ ਭਾਈ ਇਹਨੇ ਦੇਸ਼ ਕੀ ਪੁਰਾਣ ਛੋਟੀ ਬੁੱਢੀ ਵਾਲੇ ਅਸਲ ਦੇ ਵਿੱਚ ਅਰਦਾਸ ਵਰਗਿਆਂ ਦੀ ਜਿਹੜੀ ਗੱਲ ਲੈਣਾ ਇਹਨਾਂ ਨੂੰ ਕਿਹੜੇ ਕਹਿੰਦੇ ਸੀ ਇਹ ਲੋਕ ਤੋਂ ਇਹ ਤਾਂ ਕਿਹੜੇ ਦੇ ਆਦਮੀ ਤਾਂ ਵੀ ਲੱਗਦੇ ਨੇ ਗੱਦੂ ਈ ਜਿਹੜੇ ਦਾੰਦ ਕਿਹੜੇ ਕੀੜੇ ਨੇ ਉਹ ਮਨ ਲੈ ਰਹੇ ਨੇ ਕਿ ਪਰਮੇਸ਼ਰ ਹੋ ਜਾਣਾ ਬਖਸ਼ ਕਰੇ ਉਹ ਡੀਚ ਕੀਟ ਨੇ ਨਾ ਜਿਹਨੂੰ ਰਾਜੇਵਾਨ ਤਾਂ ਫਿਰ ਜਨਉਤ ਉਹਨਾਂ ਨੂੰ ਠੀਕ ਹੈ ਜੀ ਦਿੱਤੀ ਹੋਈ ਹੈ ਨਾ ਉਹਨੂੰ ਕਹਿ ਰਹੇ ਨੇ ਜੀ ਨਾ ਕਿ ਛੇ ਜੋ ਹੋ ਚੁੱਕਿਆ ਉਹ ਦੱਸੋ ਜੀ ਪਰਮੇਸ਼ਰ ਦਾ ਕੀ ਕਰਨਾ ਡੀਚ ਬੀੜ ਕੋ ਰਾਜ ਸਦਨ ਵਰ ਗਿਆ ਹਾਂ ਉਹ ਤਾਂ ਅੱਤ ਕਰ ਗਿਆ ਨਾ ਕਿ ਉਹਨਾਂ ਨੇ ਕੋਲ ਦੀ ਬੰਨ੍ਹ ਦਿੱਤਾ। ਉਹਦੇ ਕੋਲ ਉਹਦੀ ਗੱਲ। ਉਹਨੇ ਕੋਲੋਂ ਉਹਨੂੰ ਕੰਬ ਦਿੱਤਾ। ਸੰਗ। ਤੇ ਉਹਨੇ ਕਿਹ ਕੀ ਕਰਦਾ ਰਾਜਾ ਬਣਾਉਂਦਾ ਰਾਜ। ਉਹਨਾਂ ਦਾ ਬਾਹਰ ਪ੍ਰਭੂ ਤਾਂ ਉਹ ਪੈਦਾ ਹੋਇਆ ਹੋਇਆ। ਨੂੰ ਕੋਸੇ ਬਣਾ ਲੱਗਦੀ। ਇਹ ਇਸੇ ਕੋਲ ਆ। ਤੁਹੀਂ ਕਹਿੰਦਾ ਨਾ ਹੋ ਜੀ ਸਕਦਾ ਭਗਤੀ ਹੋ ਜੀ ਗਈ ਉਹ ਦੇ ਦੇ। ਤੂੰ ਇਹ ਹਟਾ ਕੇ ਦੇਖ। ਮਨੇ ਬਣਾਇਆ ਤੇ ਹਟਾ ਕੇ ਦੇਖਾ ਤੇ ਫਿਰ ਲਿਖ ਦਿੱਤੇ ਐਸੀ ਗ੍ਰੰਥ ਸਾਹਿਬ ਦੀਆਂ। ਕੋਈ ਨੂੰ ਕਹਾਂ ਆਪਨਾ ਸਭ ਕੂੜਗੱਦ ਦੀ ਮੋਛੀ ਹੋ। ਉਛੀਆਂ ਗੱਲਾਂ ਸੀ। ਕਿਹਦੀਆਂ ਸੀ। ਨੇ ਖਬਰ ਦਿੱਤੀ। ਜਾਕਾ ਦ੍ਰਿਸ਼ ਤਸੂ ਨਾ ਆਵੇ। ਪਹਿਸਤ ਤਕਾਲ ਵਿੱਦਿਸ਼ ਪ੍ਰਗਟਾਵਾ ਜਾਗਾਦਰਸ਼ ਕਾ ਜੁਨਾਵ ਜਿਹੜੀ ਚੀਜ਼ ਸਾਨੂੰ ਕੁਝ ਦਿਖਾਈ ਨਹੀਂ ਸਾਨੂੰ ਕੁਝ ਬਾਹਰ ਦੀ ਦਾ ਪ੍ਰਗਟੇ ਨਹੀਂ ਉਹਨੂੰ ਬਾਹਰ ਪ੍ਰਗਟ ਕਰਦੇ ਜਾਗਾਦਰਸ਼ ਰਸੂਲ ਆਗੋ ਉਹ ਕੀ ਚੀਜ਼ ਹੈ ਜਾਗਾਦਰਸ਼ ਕਾ ਉਹ ਸੱਚੇ ਉਹ ਆਪ ਸੱਚ ਦਾ ਦ੍ਰਿਸ਼ਟਾ ਜੂ ਨਹੀਂ ਆਉਂਦਾ ਸੱਚ ਦਾ ਕੀ ਦ੍ਰਿਸ਼ਟਾ ਆਉਗਾ ਕੁਝ ਜੇ ਚਾਹੇ ਸਾਚ ਨੂੰ ਤਤਕਾਲ ਦਾਇਤ ਸਭ ਪ੍ਰਗਟ ਕਰ ਦਿੰਦਾ ਸੱਚ ਦਾ ਆਪੇ ਆਪੇ ਪਰਗਟ ਹੋਉਂਦੇ ਦੁਨੀਆ ਦੇ ਉੱਤੇ ਸੱਚ ਪ੍ਰਗਟ ਕਰ ਦਿੰਦਾ ਸੱਚ ਦਾ ਗਿਆਨ ਸਾਰੇ ਧਰਮ ਉਹਨੂੰ ਸੱਚਾ ਜੁੰਦਾ ਮਾਰ ਮੈਂ ਕਰੂਗਾ ਹੋਰ ਕੋਣ ਕਰੂਗਾ ਮਾਰ ਮੈਂ ਕਰੂਗਾ ਹੋਰ ਕੋਣ ਕਰੂਗਾ ਸਭ ਕੁਝ ਮੈਂ ਕਰੂਗਾ ਕੋ ਹੁਕਮੇ ਕਰ ਸਦਾ ਸਾਰਾ ਕੁਝ ਛੇੜਦਾ ਹੀ ਹੁਕਮ ਦੀ ਹੈ ਇਸ ਦਾ ਹੁਕਮ ਦੀ ਗੱਲ ਹੈ ਮਾਰੂ ਹੁਕਮ ਤੋਂ ਹੀ ਛੇੜਦੇ ਬਰਬਤੋ ਪਾਰ ਬਰਬਤ ਪੂਰਨ ਬਰਬਤ ਹੋਤੇ ਫਿਰ ਪਾਰਵਰ ਨਹੀਂ ਹੂਨ ਬਰਫ ਹੁੰਦੇ ਪਰਬ੍ਰਭੀਏ ਯਾਕੋਬ ਆਪਣੇ ਘਰੇ ਬਖਸ਼ੀਸ਼ ਦਾ ਦਾ ਲੇਖਾ ਨਾ ਗਣੇ ਜਗਦੀਸ਼ ਪਰਬ ਬਖਸ਼ੀਸ਼ ਦੇ ਸਰੂਪ ਜਿੱਦੇ ਉਸ ਤੇ ਆਪਣੀ ਬਖਸ਼ੀਸ਼ ਕਰ ਦਵੇ ਦਾ ਦਾ ਲੇਖਾ ਨਾ ਗਣੇ ਜਗਦੀਸ਼ ਉਹਦਾ ਕਾਹੂ ਜੇ ਕਾਲ ਤੇ ਕੱਲ ਮੋਢਾ ਆਣਦੇ ਨਾ ਹੁੰਦਾ ਹੀ ਲੰਨਣ ਤਾਂ ਹੁੰਦਾ ਹੀ ਨਹੀਂ ਲੰਨਣ ਤਾਂ ਸਾਡਾ ਬੰਨਿਆ ਹੋਇਆ ਜਿਹਨੂੰ ਗਿਆਨ ਦੀ ਬਖਸ਼ ਕਰ ਦਵੇ ਸਾ ਉਹਦਾ ਉਹ ਜਿਹੜਾ ਅੰਦਰੋਂ ਆ ਵਾਲੇ ਤੁਸੀਂ ਪਾੜਨੇ ਹੁੰਦੇ ਲਿਖਿਆ ਹੋਇਆ ਸਾਡੇ ਜੋ ਕੁਝ ਲਿਖਿਆ ਬੁੱਧਿਆ ਹੋਇਆ ਜੋ ਜੋ ਸਾਡਾ ਲੇਖਾ ਬੰਨਿਆ ਹੋਇਆ ਨਾ ਮੈਂ ਕੁਝ ਕਰਦਾ ਜੀ ਤੇ ਬਖਸ਼ੀ ਹੋ ਜਾਂਦੀ ਹੈ ਪਾੜਦੋਂ ਦਾ ਕੋਈ ਕੋਈ ਕੁਛ ਕੱਲ ਕਰ ਆਪਣਾ ਕਰਨਾ ਜੋਗਤਾ ਆਪੇ ਆ। ਜਿਹੜਾ ਕੱਲ ਨੇ ਹਾਰ ਕਰਨਾ ਜੋਗ ਨਹੀਂ ਹੈ। ਉਹ ਹੋ ਗਏ ਹੋਣੇ ਕੀ ਤਾਂ ਇਹਦੇ ਇਹਦੇ ਆਲਾ ਕਾਪੀ ਉਹਦੇ ਛੁੱਭੀ। ਹੋਜੀ। ਜੀਓ ਪਿੰਡ ਸਾਹਿਬ ਤਿਸਤੀ ਰਾਸ ਪੂਰਨ ਬ੍ਰਹਮ ਪ੍ਰਕਾਸ਼। ਇਹ ਜੀਓ ਆ ਰਹੇ ਨੇ ਤੇ ਉਹ ਆਹ ਨਾਲ ਪੈਣਾ ਗਾ ਜੀਓ ਜੀ। ਕਿਦ ਕੱਲਾ ਜੀਓ ਸੀ। ਉਹ ਨਾਲ ਪੈਣਾ ਗਿਆ। ਸਤਿ ਸਭ ਤੁਸ਼ੀਰਾ ਕਟਕਟ ਪੂਰਨ ਬ੍ਰਹਮ ਪ੍ਰਕਾਸ਼ ਜੋ ਵੀ ਹੋਦਾ ਹੈ ਉਹ ਇਹ ਲਈ ਹੈ ਜੀਰ ਮੇਰੇ ਦੇ ਸਤਿ ਕਟਕਟ ਪੂਰਨ ਬ੍ਰਹਮ ਪ੍ਰਕਾਸ਼ ਕਟਕਟ ਪੂਰਨ ਬ੍ਰਭ ਅਨੰਤਕੀ ਪੂਰਨ ਬ੍ਰਹਮ ਪ੍ਰਕਾਸ਼ ਕਟਕਟ ਪੂਰਨ ਬ੍ਰਹਮ ਕਟਕਟ ਦੇ ਅੰਦਰ ਗੂਣ ਬ੍ਰਹਮ ਜਿਹੜਾ ਹੈ ਉਹ ਪ੍ਰਕਾਸ਼ ਦੇ ਰਿਹਾ ਹੈ ਬ੍ਰਹਮ ਦਾ ਹੀ ਪ੍ਰਕਾਸ਼ ਹੈ ਉਸਤਮ ਦੇ ਵਿੱਚ ਉਹ ਕੋਲ ਦੇ ਦੂਜੇ ਉਹ ਉੱstavਿਆ ਉਹ ਬ੍ਰਹਮਾ ਰੇ ਸਤਿਗੁਰੂ ਦੇ ਸਾਰੇ ਕੋਟ ਪਰਮ ਇੱਥੇ ਫਰਮ ਨੇ ਜਾਂ ਬ੍ਰਹਮਦੇ ਜਨੂ ਲੈ ਬ੍ਰਹਮਦੇ ਕੋਣ ਪਰ ਜਨੂ ਦੇਂਦੇ ਕੋਟ ਪਰ ਮਿਚਾਣਾ ਇਤਨੀ ਜਨਮ ਨੇ ਹਾਂ ਆਪਣੇ ਗੰਨ ਆਪ ਬਣਾਈ ਨਾਨਕ ਜੀਵੇ ਦੇਖ ਬਣਾਈ ਆਪਣੇ ਗੰਨ ਆਪ ਬਣਾਈ ਅਪਣਾ ਤਾਂ ਆਪਣਾ ਹੀ ਹੈ ਪਰ ਮੈਂ ਸਤਨਾਏ ਆਪਣੀ ਬਣ ਕੇ ਆਪ ਆ ਆਪਣੀ ਕੰਨ ਚ ਕੀ ਹੈ ਜੇ ਪਰਮ ਪ੍ਰਭ ਦਾ ਰੂਪ ਤਾਂ ਉੱਡ ਕੀਤਾ ਹੈ ਪਰਮ ਦੇ ਆਪਣੀ ਮਨ ਦਾ ਆਪੇ ਬਣ ਗਿਆ ਪਰ ਕਿਸੇ ਦੀ ਲੋੜ ਨਹੀਂ ਪਈ ਸਾਨੂੰ ਪੂਰਨ ਪਰਮ ਦੇ ਨਾਲ ਪਰਮ ਪਾਸ ਪੱਡੂ ਬਾਤੇ ਉਪਰਲੀ ਰੋਡ ਪੈੜੀ ਹੈ। ਟਿਕਵਾ ਲੋਰ ਪੈੜੀ। ਜੇ ਬੀਜੁ ਕੇ ਜਾਂਦੇ ਤਾਂ ਕਿ ਫੋੜ ਨੂੰ ਚੱਕਾ ਉਹਦੇ ਕੋਲੇ ਰਹਿ ਸਕਤੀ ਸੀ। ਉਪਰੋਂ ਪਾਣੀ ਦਾ ਛਿੱਟਾ ਮਿਲਿਆ। ਹਣੀ ਦਾ ਛਿੱਟਾ ਪੜਿਆ ਉਪਰੋਂ ਤਾਂ ਆਣੇ ਪੜਿਆ ਉਪਰੋਂ ਜਲ ਵਾਛਿਆ ਗਿਆ। ਹਸਪਤਾਲੇ ਸਾਰੇ ਆ ਗਏ ਉਸ ਤੋਂ